ਮਰਾਪਾ ਗੱਗੇ ਅੱਖਰ ਦਾ ਉਪਦੇਸ਼ ਲੈਣਾ ਹੈ ਜੀ ਹਾਂ ਜੀ ਇਹ ਉਪਦੇਸ਼ ਆਪਾਂ ਨੂੰ ਚਾਰ ਬਾਣੀਆਂ ਚੋਂ ਪ੍ਰਾਪਤ ਹੋਏਗਾ ਜੀ ਹਾਂ ਇੱਕ ਇੱਕ ਪੌੜੀ ਦਰਜ ਹੈ ਜੀ ਗੱਗੇ ਅੱਖਰ ਦੇ ਪ੍ਰਤੀ ਅੱਛਾ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਗੱਗਾ ਗੁਰ ਕੇ ਬਚਨ ਜਿਹੜੇ ਗੁਰੂਤ ਕੇ ਬਚਨ ਨਾਲ ਗੁਰਬਾਣੀ ਹੈ ਇਹਦੀ ਮਦਦ ਨਾਲ ਪਛਾਣੀ ਹੈ ਪਰ ਗੁਰਬਾਣੀ ਤੋਂ ਇਲਾਵਾ ਜਲੀ ਹੋਰ ਕੋਈ ਗੱਲ ਸੀ ਗੁਰਬਾਣੀ ਤੋਂ ਵਿਰੋਧ ਤੇ ਗੁਰਬਾਣੀ ਨਾਲ ਨਾਮਹਿਲ ਘੜ ਵਾਲੀ ਦੂਜੀ ਬਾਤ ਸਤਾਰ ਇੱਕ ਉਹ ਸੁਣੀ ਹੋਈ ਨਹੀਂ ਉਹ ਮੰਨੀ ਹੋਈ ਨਹੀਂ ਹੈ ਜਿਹੜੇ ਬਾਹਰ ਗੱਲ ਕਰਦੇ ਤੇ ਮੰਨੀ ਹੋਈ ਨਹੀਂ ਤਾਂ ਪਛਾਣਿਆ ਅਕਲ ਚ ਅਸੀਂ ਗੁਰਬਾਣੀ ਦੇ ਨਾਲ ਨਾਲ ਦੂਜੀ ਬਾਤ ਮੰਨੀ ਜਾਂਦੇ ਹਾਂ ਭਾਈ ਗੁਰਦਾਸਿਆਂ ਵਾਲਾ ਬਿਲਕੁਲ ਗੁਰਬਾਣੀ ਤੋਂ ਖਿਲਾਫ ਹੈ ਇਹਨਾਂ ਦਾ ਕੋਈ ਰੌਲਾ ਹੀ ਨਹੀਂ ਉਹ ਤਾਂ ਜਿਨ੍ਹਾਂ ਨੇ ਬਣਾਈਆਂ ਸੀ ਉਹਨਾਂ ਨੇ ਵੀ ਲਿਓ ਲਾਉਣ ਦਾ ਤੇ ਬਣਈਏ ਸੀ। ਅਦੂਆਇ ਟਾਰ ਗਾਂਡ ਪੰਡਾ ਇਹ ਵੀ ਕੱਠੀ ਬਾਣੀ ਸਾਨੂੰ ਤਾਂ ਕੱੱਚੀ ਬਾਣੀ ਸੁਣਨ ਦਾ ਹੱਕੇ ਨਹੀਂ ਸੀ। ਉਹ ਕੱਠੀ ਬਾਣੀ ਦੀ ਉਹ ਗੱਲ ਕਰ ਰਿਹਾ। ਮੈਂ ਕੱਠੀ ਬਾਣੀ ਸੁਣੀ ਹੋਈ ਨਹੀਂ। ਕੱਠੀ ਬਾਣੀ ਦੂਜੀ ਬਾਤ ਹੈ ਪੱਕੀ ਬਾਣੀ ਦੂਜੀ ਬਾਤ ਹੈ। ਉਹ ਦੱਦੇ ਉਪਦੇਸ਼ ਤੇ ਪਹਿਲਾਂ ਕਬੀਰ ਦਾ ਪਦ ਗੁਰੂ ਦੇ ਪੜਾਂਗੇ ਵਿਚਾਰਾਂਗੇ ਕਿਹੜਾ ਪਾਣਾ ਗੁਰਨਾਥ ਦੇ ਵੀ ਜਿਹਦਾ ਵਿਚਾਰਾਂਗੇ ਫਿਰ ਗੁਰੂ ਵਰਦਾ ਦਾ ਵਿਚਾਰਾਂਗੇ ਫਿਰ ਪੰਜਵੀਂ ਪਾਸ਼ਾ ਦਾ ਵਿਚਾਰਾਂਗੇ ਗੱਲ ਇੱਕੋ ਆਉ। ਜੋ ਪੱਕੀ ਜਾਂਦੀ ਹੈ। ਇਸ ਕਰਕੇ ਕੱਚੀ ਬਾਣੀ ਨਹੀਂ ਇਸ਼ਾਰਾ ਕਰ ਰਹੇ ਕਬੀਰ ਜੀ ਦੇ ਵਿੱਚ। ਉਦਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਸਾਰੇ ਹਾਂਜੀ। ਰਹੈ ਵਿਹੰਗਮ ਰਹੇ ਬੰੰਮ ਬੰੰਮ ਮਾਰਾਂ ਜਿੰਨਾ ਚ ਨਹੀਂ ਹੁੰਦਾ ਯਾਨੀ ਤੁਲਨਾ ਦਿਲਨਾ ਬੰਦ ਕਰ ਦਵੇ ਬੰਦ ਮਨ ਪਟਕਣਾ ਬੰਦ ਕਰ ਦਵੇ ਟਿੱਕੇ ਬੈਜਵੇ ਘਰ ਚੱਪ ਕਹਤਾ ਹੈ ਨਾ ਜਾਈ ਜਾਂਦਾ ਹੀ ਉਹ ਆ ਜਿਹੜਾ ਇੱਕ ਤਾਂ ਬੈਜਵੇ ਬੰੰਮ ਇਹ ਸਮਝ ਲੈ ਮੈਨੂੰ ਉਹ ਆ ਜਿਹੜਾ ਕੁਝ ਕੋਲ ਨਾ ਹੋਵੇ ਤੋ ਫਿਰਦਾ ਰਹੇ ਗੁਰਬਾਣੀ ਮੈਂ ਹੰਮ ਗਾਇਦੀ ਕਹਤਾ ਹੈ ਨਾ ਜਾਈ ਜਾਂਦਾ ਹੀ ਕਿਤੇ ਜਿਹੜਾ ਉਹ ਬੰੰਮ ਵਿਹੰਗਮ ਨੇ ਅਸੂਲ ਟੇਕੀਤੇ ਪੈਣ ਜਿਨੇ ਸ਼ਾਦੀ ਨ ਕਰਾਈ ਹੋਵੇ ਉਹਨੂੰ ਕਹਿ ਦਿੰਨੇ ਵੀ ਵਿਹੰਗਮ ਉਹ ਇਹ ਹੁਣ ਕਹਿਣ ਲੱਗੇ ਪਹਿਲਾਂ ਨਹੀਂ ਸੀ ਕਹਿੰਦੇ ਪਹਿਲਾਂ ਮੈਂ ਉਹਨੂੰ ਜਿਹੜਾ ਚੱਕਰਵਰਤੀ ਰਹੇ ਕੋਈ ਡੇਰਾ ਡੂਰਾ ਨਾ ਬਣਾਵੇ ਉਹ ਆਪਣੇ ਆਪ ਨੂੰ ਵਿਹੰਗਮ ਕਹਾਉਂਦਾ ਕਿਉਂਕਿ ਉਹਨੇ ਨਹੀਂ ਉਹ ਬਿਆਨ ਗੋਮ ਆ ਉਹ ਤਾਂ ਕੁਝ ਹੋ ਰਿਹਾ ਉਹਨੂੰ ਤਾਂ ਪਤਾ ਹੀ ਨਹੀਂ ਬਹਿੰਗਮ ਦੇ ਅਸਲੀ ਹੁੰਦੇ ਨੇ ਇਹ ਬਹਿੰਗਮ ਕਹੋਂਦਾ ਰਹੇ ਬਹਿੰਗਮ ਕਾਤੜਾ ਨਾ ਜਾਈ ਇਹ ਕਹਦੇ ਉਹਨੂੰ ਕਹਿੰਦੇ ਸ਼ਾਦੀ ਨਹੀਂ ਸੀ ਕਰਾਈ ਇਹਦਾ ਹਨਵਾਨ ਨੂੰ ਨੇ ਕਹਿੰਦੇ ਪਾਈ ਗੁਰਦਾਸ ਨੂੰ ਕਹੀ ਜਾਂਦਾ ਨੇ ਉਹਨੂੰ ਜਤੀ ਕਹਿੰਦੇ ਆ ਜੀ ਕਿ ਉਹ ਵੇਂਦਮ ਨਾ ਜਤੀ ਦੋ ਹੋਗੇ ਫਿਰ ਜਾਂ ਫਿਰ ਇਹ ਵੇਂਦਮ ਨਹੀਂ ਜਤੀ ਹੈ ਨਹੀਂ ਰਹੇ ਵਿਹੰਗਮ ਨਾ ਜਾਈ ਕਹਿੰਦ ਦਾ ਪਾਪ ਟਕਾ ਰੱਖਣਾ ਹੈ ਨਾ ਰਹਿਣਾ ਕੇ ਰੱਖਣਾ ਹੈ ਬੰਦ ਦਾ ਬਦਲ ਹੈ ਨਾ ਜਾਈ ਜਾਣਾ ਕਿਤੇ ਜਿਹੜਾ ਜਾਂਦਾ ਤੁਰਿਆ ਫਿਰਦਾ ਮਨ ਮੈਂ ਸਰੀਰ ਕਰਕੇ ਤੁਰਿਆ ਫਿਰਦਾ ਉਹ ਵਿਹੰਗਮ ਕਿੱਥੇ ਸਾਡੇ ਇਹਨਾਂ ਨੇ ਤਾਂ ਸਰੀਰ ਨਾਲ ਛੋੜ ਲਈ ਗੱਲ ਗੱਲ ਤਾਂ ਮੰਨਦੀ ਸੀ ਮਨ ਕਰਕੇ ਸੀ ਵਿਹੰਗਮ ਕੋਲ ਤਾਂ ਆਪਣੇ ਕੋਈ ਨਾ ਜਾਈ ਅਗਹਿ ਰਹੇ ਵਿਹੰਗਮ ਕਤਹੈ ਰਹੇ ਤਿਆਗ ਰਹੇ ਆਪਣੇ ਅਗਹਿ ਗਹਿ ਕਦਾਇ ਉਹਦਾ ਮਾਨ ਦਾਇ ਨਹੀਂ ਫੜਿਆ ਜਾ ਸਕਦਾ ਇਹਨੂੰ ਫੜ ਕੇ ਰੱਖੇ ਮਨ ਨੂੰ ਆਬੂ ਚ ਰੱਖੇ ਗਾਗਨ ਰਾਈ ਇਹਨੂੰ ਆਕਾਸ਼ ਨਾਲ ਜੋੜ ਕੇ ਰੱਖੇ ਤੇਰ ਕੁੱਡੀ ਨਾਲ ਜੋੜ ਕੇ ਫਿਰ ਗਗਨ ਨਾਲ ਫੜ ਕੇ ਰੱਖ ਲਈਏ ਗਗਨ ਦੇ ਵਿੱਚ ਹੀ ਫੜ ਕੇ ਰੱਖੀਏ ਇੱਥੇ ਹੀ ਦਮਾਂ ਗਗਨ ਦੇ ਵਿੱਚ ਸ਼ਬਦ ਪ੍ਰਗਟ ਹੋਣਾ ਇੱਥੇ ਮਨ ਪਹਿਲਾਂ ਹੀ ਬਿਠਾ ਲਈ ਜੀ ਆ ਕੇ ਇੱਥੇ ਦਰੂ ਗੱਦਨ ਤੇ ਬਾਬਾ ਕੇ ਬਹਿ ਜਵੇ ਤੇ ਨਾਲ ਹੈ ਜੀ ਗੁਰ ਕੇ ਬਚਨਾਂ ਨਾਲ ਪੜਨਾ ਤਲਵਾਰੀਆਂ ਅੱਛਾ ਗਿਆਨ ਦੇ ਜਾਲ ਆਉਂਦਾ ਹੈ ਠੀਕ ਹੈ ਜੀ ਇੱਥੇ 9ਵੀਂ ਪੌੜੀ ਦਾ ਜਿਹੜਾ ਭਗਤ ਕਬੀਰ ਜੀ ਦਾ ਉਪਦੇਸ਼ ਸਮਾਪਤ ਹੈ ਜੀ ਹੁਣ ਆਪਾਂ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਵੱਲੋਂ 7ਵੀਂ ਪੌੜੀ 'ਚ ਦਰਜ ਹੈ ਜੀ ਗੱਗੇ ਅੱਖਰ ਦਾ ਉਪਦੇਸ਼ ਗੱਗੇ ਗੋਏ ਗਾਏ ਜਿਨ ਛੋਡੀ ਗੱਲਿੰ ਗੋਵਿੰਦ ਗਰਭ ਭਇਆ ਹਾਂ ਗੱਗਾ ਗੋਏ ਗਾਇ ਜਨ ਛੋਡੀ ਰੱਗਾ ਆ ਜਿਹੜੀ ਸੁਰਤਾ ਨਾ ਜੀਵ ਆਪਣੇ ਮੂੜ ਨੇ ਆਪਣਾ ਧਿਆਨ ਸਰੀਰ ਤੇ ਲਾਤਾ ਜੋਤ ਆਪਣੀ ਜੋਤ ਛੱਡਤੀ ਗੋਏ ਜੋਤ ਹੈ ਉਹਦੀ ਇਹਦੇ ਵਿੱਚ ਗੋਏ ਕੇ ਛੱਡਤੀ ਗਾਏ ਗੋਏ ਜਨ ਛੋਡੀ ਹਾਂਜੀ ਗੱਲ ਨਹੀਂ ਗੋਬਿੰਦ ਗਰਭ ਪਿਆ ਗੱਲ ਜਿਹੜੀਆਂ ਗੱਲਾਂ ਨੇ ਨਾ ਗੱਲਾਂ ਗੱਲਾਂ ਜਿਹਦਾ ਗੋਬਿੰਦ ਦਾ ਗੜਬਾ ਜਿਹੜਾ ਹੰਕਾਰੀ ਗੋਬਿੰਦ ਸਾਬਤ ਹੁੰਦਾ ਹੰਕਾਰ ਹੈ ਗੋਬਿੰਦ ਦਾ ਗੋਬਿੰਦ ਕ੍ਰਿਸ਼ਨ ਨੂੰ ਕਹਿੰਦੇ ਨੇ ਉਹ ਗੱਲਾਂ ਦੇ ਵਿੱਚ ਹੰਕਾਰੀ ਬਣਿਆ ਆ ਗੱਲੀ ਗੋਬਿੰਦ ਬਲੂਮ ਦਊਗਾ ਗੋਬਿੰਦ ਦੇ ਚ ਗਰਬ ਹੈ ਗੋਬਿੰਦ ਦੀ ਗਰਬੀ ਹੁੰਦਾ ਸੱਚੀ ਬਾਣੀ ਜੇ ਹੋਊਗੀ ਇੱਕ ਗੱਲ ਹੋਊਗੀ ਗੋਬਿੰਦ ਗਰਬ ਨਹੀਂ ਹੈ ਕਰਾ ਕਰਾ ਦੀਆਂ ਗੱਲਾਂ ਜਿਹੜੇ ਕਰ ਵਾਲੇ ਨੇ ਉਹ ਗੋਬਿੰਦ ਨੂੰ ਹੰਕਾਰੀ ਸਾਬਤ ਕਰਦੇ ਨੇ ਕ੍ਰਿਸ਼ਨ ਨੂੰ ਹੰਕਾਰੀ ਸਾਬਤ ਕਰਦੇ ਨੇ ਤੇ ਮੈਂ ਮੈਂ ਕਰਦਾ ਉੱਥੇ ਦਿਖਾਇਆ ਹੋਇਆ ਗੱਲੀ ਗੋਬਿੰਦ ਗਰਬ ਪਿਆ ਜਿਹੜੇ ਬਾਲ ਦੀਆਂ ਗੱਲਾਂ ਕਰਦੇ ਨੇ ਉੱਤੇ ਗੋਬਿੰਦ ਨੂੰ ਗੱਲਾਂ ਨੇ ਗੋਬਿੰਦ ਨੂੰ ਤਾਂ ਗਾਲੀ ਗੋਬਿੰਦ ਨੂੰ ਗਰਭ ਹੈ ਨਹੀਂ ਹੈ ਜੀ ਤਾਂ ਨਾ ਗੋਬਿੰਦ ਨੂੰ ਗਰਭ ਕਿੱਥੇ ਹੁੰਦਾ ਜੇ ਗੋਬਿੰਦ ਨੂੰ ਗਰਭ ਹੋਇਆ ਤਾਂ ਫਿਰ ਗਰਭ ਤੋਂ ਬਚਿਆ ਕੌਣ ਬਚਾਊ ਕੌਣ ਗੋਬਿੰਦ ਤਾਂ ਹੰਕਾਰ ਦਾ ਪ੍ਰਹਾਰੀ ਹੈ ਹੰਕਾਰ ਦੇ ਪ੍ਰਹਾਰ ਕਰਨ ਵਾਲਾ ਹਾਂਜੀ ਟੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੇ ਤਈ ਕੀਆ ਸਰੀਰ ਬਣਾਇ ਲਏ ਨੇ ਆਵੀ ਸਾਜੀ ਹੈ ਇਹ ਜਿੱਥੇ ਖੜੇ ਛੰਦੇ ਨੇ ਜਿੱਥੇ ਪਕਾਏ ਜਾਂਦੇ ਨੇ ਉਹ ਵੀ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੇ ਇਹਨੂੰ ਤਾਂ ਦੇ ਕੇ ਪੁਕਾਰਿਆ ਹੁਣ ਉਹ ਉਹ ਦੇ ਗਿਆਨ ਪ੍ਰਚੰਡ ਕਰਨਾ ਗਿਆਨ ਪ੍ਰਚੰਡਣਾ ਪੱਕਣਾ ਹੈ ਜਾ ਕੇ ਫੈਨਾ ਗਿਆਨ ਖੰਡਾ ਤੇ ਗਿਆਨ ਪ੍ਰਚੰਡ ਗੁਰ ਗਿਆਨ ਘਟ ਜਾ ਬਲੂਗਾ ਤਾਂ ਕਿਤੇ ਜਾ ਕੇ ਪਕਣਾ ਨਹੀਂ ਤ੍ਰਿਸ਼ਨਾ ਨਾਲ ਨਹੀਂ ਪਕਣਾ ਹੈ ਤ੍ਰਿਸ਼ਨਾ ਦੀ ਅਗਨ ਉਹ ਤੇ ਬਿਗੜਨਾ ਸੰਸਾਰੀ ਅਗਨ ਨਹੀਂ ਪਕਣਾ ਸੰਸਾਰੀ ਤਾਂ ਸਰੀਰ ਵਾਸਤੇ ਉਹ ਵੀ ਤਾਂ ਸਰੀਰ ਚੋਕੇ ਅੰਗ ਤੇ ਬਿਨ ਸਰੀਰ ਦੀ ਬਣਿਆ ਹੋਇਆ ਪੰਜਵਾ ਜਿੰਦਗੀ ਨਹੀਂ ਰਹਿ ਸਕਦੀ ਅਗਨ ਬਾਲ ਦੀ ਅਗ ਦੀ ਗੱਲ ਨਹੀਂ ਸੀ ਬਾਲ ਦੀ ਅਗ ਸਰੀਰ ਨਾਲ ਅੰਦਰਲੇ શરીਰ ਦੇ ਪਕਾਉਣ ਵਾਸਤੇ ਪੱਕੀ ਬਾਣੀ ਹੋਣ ਵਾਸਤੇ ਗਿਆਨ ਪ੍ਰਚੰਡ ਦੀ ਲੋੜ ਹੈ ਅੱਛਾ ਪਾਂਡੇ ਜਨ ਆਵੀ ਸਾਜੀ ਚਾੜਨ ਵਾਹ ਹੈ ਤਈ ਕੀਆ ਤਈ ਕੀ ਹੁੰਦਾ ਜੀ ਅੱਛਾ ਜੀ ਤਾਂ ਇਹ ਪੱਕ ਜਵੇ ਆ ਉੱਤੇ ਲਿਖਿਆ ਤੇ ਤਈ ਕੀਆ ਲਿਖ ਦਿੱਤਾ ਕੀਆ ਲਿਖਿਆ ਜੀ ਤਈ ਕੀਆ ਅਰਥਾ ਜੀ ਫੇਰ ਗੱਲ ਕੀ ਬਣੀ ਜੀ ਸਾਰੀ ਇਹ ਸਿਰਫ ਤਾਂ ਇਹਦੇ ਸ਼ਰੀਰ ਦਿੱਤਾ ਹੈ ਮਲਾਇਆ ਉਸੇ ਨੇ ਅੱਗੇ ਤੱਕ ਪੱਕੇ ਕਰਕੇ ਉਸੇ ਵੀ ਕੱਚੀ ਮਿੱਟੀ ਜਿਹਨੇ ਪਕਾਉਣਾ ਉਸੇ ਨੇ ਉਹ ਗਿਆਨ ਨਾਲੇ ਜਾਊ ਹਾਂ ਜੀ ਗੁਰ ਘੱਟ ਬੜਿਆ ਵੀ ਗੱਗਾ ਗੁਰ ਕੇ ਬਚਨ ਜੇ ਪਛਾਣ ਲਊਗਾ ਤਾਂ ਤਈ ਚ ਆਜੂਗਾ ਨਹੀਂ ਤਾਂ ਕੱਚਾ ਹੀ ਰਹਿ ਜਾਊਗਾ ਇਹਨੂੰ ਬਾਲਣ ਬੜਨਾ ਨੇ ਨੇ ਘੱਟ ਬੜਨਾ ਤਾਂ ਉਹਨੂੰ ਪਕਾਉਣਾ ਉਹਨੇ ਪਖੜੇ ਠੀਕ ਹੈ ਜੀ ਹੁਣ ਮਹੱਲਾ ਤੀਜਾ ਜੀ 15 ਨੰਬਰ ਪੌੜੀ ਚ ਤੀਹਰੇ ਪਾਤਸ਼ਾਹ ਦਾ ਵੀ ਉਪਦੇਸ਼ ਹੈ ਜੀ ਗੱਗੇ ਗੋਬਿੰਦ ਚਿੱਤਕਰ ਮੂੜੇ ਗੱਲ ਨਹੀਂ ਕਿਨੇ ਨਾ ਪਾਇਆ ਆ ਗੋਬਿੰਦ ਚਿੱਤਕਰ ਮੂੜੇ ਚਿੱਤ ਨੂੰ ਆਪਣੇ ਗੋਬਿੰਦ ਮੰਨ ਲੈ ਇਹਨੂੰ ਕਾਹ ਵੀ ਹੈ ਗੋਬਿੰਦ ਇਹਨੂੰ ਕੱਲ ਗੋਬਿੰਦ ਬਣਾ ਲੈ ਬਾਹਰ ਤੂੰ ਰਹਿਣ ਦੇ ਗੋਬਿੰਦ ਨੂੰ ਜਿਹੜਾ ਬਣਾਈ ਫਿਰਦਾ ਬਣ ਤੂੰ ਮੂੜ ਕਾ ਜਿਹੜਾ ਬਾਦ ਮੰਦੀ ਬੈਠਾਂ ਗੋਵਿੰਦ ਗੋਵਿੰਦ ਤਾਂ ਤੇਰਾ ਮੂੜ ਹੈ ਗੰਗਾ ਗੋਵਿੰਦ ਚਿਤ ਕਰ ਮੂੜ ਹੈ ਗੱਲ ਨਹੀਂ ਕਿਨੇ ਨਾ ਪਾਇਆ ਆ ਗੱਲਾਂ ਜਿਹੜੀਆਂ ਗੱਲਾਂ ਨੇ ਸਾਰੇ ਗ੍ਰੰਥ ਲਿਖੇ ਨੇ ਗੱਲਾਂ ਨੇ ਸਮਰ ਸਾਸਤ੍ਰ ਦੇ ਵਿੱਚ ਉੱਥੋਂ ਕਿਸੇ ਨੇ ਪ੍ਰਾਪਤੀ ਨਹੀਂ ਹੋਈ ਗੋਵਿੰਦ ਦੀ ਗੋਵਿੰਦ ਅੰਦਰ ਹੈ ਸਭ ਦੇ ਠੀਕ ਮੰਨ ਲੈ ਤੇਰਾ ਚਿਤ ਕੀ ਤੇਰਾ ਗੋਵਿੰਦ ਗੁਰਨਾਣਕ ਸਾਹਿਬ ਕਹਲੇ ਸੀਗੇ ਗੱਗੇ ਗੋਏ ਗਾਏ ਜਿਨ ਛੋੜੀ ਗੱਲੀ गोविंद ਗਰਭ ਭਇਆ ਇੱਥੇ ਵੀ ਗੱਲੀ ਦੀ ਗੱਲ ਵੀ ਆਉਂਦੀ ਹੈ ਜੀ ਕਥਾ ਕਹਉਂਦੀਆਂ ਗੱਲਾਂ ਹੀ ਨੇ ਨੇ ਸਾਰਾ ਭਰਮ ਭਲਾਏ ਨੇ ਲੋਕ ਗੱਲੀ ਕਿਨੇ ਨਾ ਪਾਇਆ ਹਾਂਜੀ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਜੇ ਗੁਰਕੇ ਚੱਲਣਾ ਹੈ ਤੇ ਹੁਣ ਵੀ ਵਿਸਾਲਵੇਂ ਗੁਰਕੇ ਜਿਹੜੇ ਚੱਲਣਾ ਹੈ ਗੁਰਕੇ ਜਿਹੜੇ ਗੁਣ ਦੇ ਸਤਗੁਰ ਦੇ ਗੁਣ ਨੇ ਗੋਬਿੰਦ ਵਾਲੇ ਗੁਣ ਨੇ ਇਹ ਕਹ ਲੋ ਜੇ ਹੁਣ ਵੀ ਇੰਦਾ ਜਿਹਾ ਹਟ ਕਰ ਲਵੇ ਉਹ ਤੇਰੇ ਜਿਹੜੇ ਪਹਾ ਵੀ ਸਾਸਾ ਦੇਹ ਕਾ ਬਿਲਮ ਨਾ ਮੀਤ ਮੈਂ ਉਹ ਤੇ ਵੀ ਗੁਨਾ ਦੀ ਗੱਲ ਕੀਤੀ ਸੀ ਇੱਥੇ ਵੀ ਗੁਨਾ ਦੀ ਉਹ ਗੱਲ ਕੀਤੀ ਇਹਨਾਂ ਨੇ ਬਾਕੀ ਕਹਿ ਦੱਤਾ ਗੱਲਾਂ ਨਾਲ ਦੋ ਜਗ੍ਹਾ ਗੱਲਾਂ ਦੀ ਗੱਲ ਕੀਤੀ ਹੈ ਵੀ ਗੱਲਾਂ ਨਾਲੇ ਤੁਸੀਂ ਉਲਟੇ ਉਹ ਕਹਿੰਦੇ ਬਾ ਮੁਖ ਹੈ ਇਹ ਗੋਪਿੰਦ ਜਿਹੜੇ ਗੁਣ ਨੇ ਨਾ ਉਹ ਤਾਂ ਕਰ ਲੋ ਬਾਕੀ ਛੱਡੋ ਸਭ ਕੁਝ ਰੰਗਾ ਗੋਬਿੰਦ ਗੁਣਾ ਰਬੋ ਸਾਸ ਸਾਸ ਜਪੀ ਨੀਠ ਸਾਸ ਸਾਸ ਗੋਵਿੰਦ ਗੁਣਾ ਨੂੰ ਸਮਝੋ ਤੇ ਗੋਵਿੰਦ ਗੁਣਾ ਨੂੰ ਤਾਲਣ ਕਰਦੇ ਰਹੋ ਇਹ ਦੇਹ ਦਾ ਕੋਈ ਭਰੋਸਾ ਨਹੀਂ ਕਦੋਂ ਇਹ ਸਾਹ ਮੁੱਕ ਕਰਿਓ ਦੇਰੀ ਨਾ ਕਰੋ ਇਹਦਾ ਕੋਈ ਭਰੋਸਾ ਨਹੀਂ ਹੈਗਾ ਉਹ ਦੇਰ ਨਾ ਕਰਿਓ ਵੀ ਆਜ ਦੋ ਮੁੰਡੇ ਸੌਣ ਆਲੇ ਨੇ ਆਹ ਫਰਾਨਾ ਕੰਮ ਕਰਨ ਆਲੇ ਉਹ ਕੰਮ ਨਾਲ ਏ ਨੀਕੋ ਦੇਰਾ ਕੋਪਰਾ ਦੂ ਅਗਲਾ ਕੋਈ ਲੈ ਕੇ ਤਾ ਵੀ ਉਮਰ ਹੈ ਪਹਿਲਾ ਕੰਮ ਦੇ ਨਾਲ ਵੀ ਚਲਦੇ ਰਹਿਣਾ ਇਧਰ ਇਹ ਕੰਮ ਜ਼ਰੂਰੀ ਹੈ ਠੀਕ ਹੈ ਜੀ ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ ਓਹ ਬੇਰਾ ਨਾ ਬੁੱਝੀਐ ਜੋ ਆਏ ਪਰੇ ਜਮ ਫੰਦ ਜਮ ਦੇ ਫੰਦ ਕੋਈ ਵੇੜਾ ਬਾਲਕ ਨਹੀਂ ਮਰਦੇ ਨਹੀਂ ਬਾਲਕ ਨਹੀਂ ਜੋ ਮੈਨੂੰ ਮੈਂ ਜੋਬ ਨੂੰ ਨਾ ਜਵਾਨਾਂ ਦਾ ਕੋਈ ਪਤਾ ਨੇ ਨਹੀਂ ਬਿਰਦੀ ਕੱਟ ਬੰਦ ਟੰਟੀਆਂ ਦਾ ਬਿਰਦਾਣਾ ਵੀ ਕੋਈ ਟਾਈਮ ਨਹੀਂ ਹੈ ਕੋਈ ਹੈ ਕਰੋ ਕਿਸੇ ਨੇ ਬੰਨਣਾ ਉਹ ਵੇਲੇ ਨਾ ਬੁਝੀਏ ਕੋਈ ਕਿਸੇ ਨੂੰ ਪਤਾ ਨਹੀਂ ਉਹ ਵੇਲੇ ਦਾ ਜਦੋਂ ਜਾਂਦਾ ਬੰਨਦਾ ਪੈਣੇ ਇਸ ਕਰਕੇ ਦੇਰੀ ਕਰਨ ਦੀ ਲੋੜ ਨਹੀਂ ਪਹਿਲਾਂ ਉੜਦੇ ਇਹ ਕੰਮ ਲੱਗ ਜੂ ਇਹ ਕੰਮ ਨੂੰ ਵੇੜ ਕੇ ਫਿਰ ਜੋ ਮਰਜ਼ੀ ਕਰ ਜਾਓ ਜੀ ਜੀ ਜਿਆਨੀ ਧਿਆਨੀ ਚਤੁਰਪੇਖ ਰਹਿਣ ਨਹੀਂ ਇਹ ਠਾਏ ਸਾੜ ਛਾੜ ਗਈ ਮੂੜ ਤਹਾਂ ਲਪਟਾਈ ਉਹ ਤੂੰ ਮੁਰਗ ਬਣ ਕੇ ਕਿੱਥੇ ਮਾਇਆ ਨਾਲ ਲਪਟਿਆ ਫਿਰਦਾ ਤੇ ਗਿਆਨੀ ਧਿਆਨੀ ਚਤੁਰਥਿਆਣੇ ਕੋਈ ਇੱਥੇ ਰਿਹਾ ਨਾ ਕਿਸੇ ਨੇ ਰਹਿਣਾ ਨਾ ਕੋਈ ਰਿਹਾ ਤੂੰ ਕਿੱਥੇ ਲਪਟਿਆ ਪੈ ਮਾਇਆ ਨਾਲ ਗੂੜ ਘਾਣ ਲਪਟਿਆ ਇਹਤੇ ਨਹੀਂ ਕੋਈ ਵੀ ਦੇ ਆ ਨਾ ਕਿਸੇ ਨੂੰ ਤੁਸੀਂ ਆਪਣਾ ਜਿਹੜਾ ਕੰਮ ਹੈਗਾ ਹੈ ਗੋਵਿੰਦਨਾ ਜੁੜਨਾ ਹੈ ਗੋਬਿੰਦ ਨੂੰ ਲੱਭ ਲੋ ਤੇ ਗੁਣ ਢਾਲ ਨਿਕਾਲ ਲੋ ਗੋਵਿੰਦਰ ਬਣ ਜਾਣਾ ਤੁਸੀਂ ਗੁਣਾ ਤੇ ਬਿਨਾ ਤੁਹਾਨੂੰ ਲੱਗੇ ਲੱਗਣੇ ਨਹੀਂ ਦੇਣਾ ਨਾਲੀ ਸਮਝ ਆਵੇ ਤੁਹਾਨੂੰ ਜੇ ਗੋਵਿੰਦ ਮੰਨੇ ਬੈਠੇ ਹੋ ਮਾਇਆ ਨੂੰ ਦੇਹ ਨੂੰ ਸਰੀਰ ਨੂੰ ਇੱਕ ਮੂਰਤੀ ਨੂੰ ਮੂਰਤੀ ਦਾ ਪ੍ਰਾਣੀ ਨਹੀਂ ਹੁੰਦਾ ਤੂੰ ਤਾਂ ਪ੍ਰਾਣੀ ਐ ਆਪੇ ਤੂੰ ਮੂਰਤੀ ਨੂੰ ਜਿਵੇਂ ਜ ਤੇਰਾ ਸਰੀਰ ਤੇ ਮੂਰਤੀ ਚੰਗੀ ਹੁੰਦੇ ਨੂੰ ਇਹਦੇ ਚ ਖੂਨ ਚੱਲਦਾ ਹੈ ਰੋਟੀ ਚੰਗਾ ਜੇ ਚੰਗਾ ਸਮਝ ਲਿਆ ਉਹਨੂੰ ਆਪਣੇ ਸਰੀਰ ਨਾਲ ਫਿਰ ਤੂੰ ਮੂਰਖੀ ਬੂੜ ਬੂੜਾ ਬੂੜਾ ਬੂੜਾ ਬੂੜਾ ਇਲਾ ਰੈਜੰਦਾਰੇ ਬਾੜ ਇਹਦੇ ਚ ਠੀਕ ਹੈ ਹਰ ਜਿਹੜਾ ਉਹਦਾ ਉਹ ਊਰਗ ਤਾਂ ਉਹ ਤੇ ਪੁੱਛਦਾ ਉਹ ਤੇਰੇ ਸਰੀਰ ਦਾ ਪੁੱਤ ਕੱਟਿਆ ਮੈਨੂੰ ਤੂੰ ਬੰਦੀ ਬੈਠਾ ਉਹ ਤਾਂ ਕੁਝ ਮਿਲੂ ਹਾਂਜੀ ਤੇ ਜਾਂ ਕੋ ਪ੍ਰਿਅ ਸੁਹਾਗ ਜੇ ਗਿਆਨ ਕਦਰ ਮਿਲ ਜਾਣਾ ਉਹਦੀ ਕਿਰਪਾ ਨਾਲ ਤਾਂ ਕੁਝ ਚਿੱਤੇ ਰੱਖ ਸਕਦਾ ਸਿਮਰਤ ਰਹੈ ਗਿਆਨ ਦੀ ਕਿਰਪਾ ਨਾਲ ਤਾਂ ਜੁੜਿਆ ਰਹਿੰਦਾ ਹੈ ਰਹਿੰਦਾ ਜਿਹੜਾ ਬਾਕੀ ਕਰਮ ਕਾਂਡ ਉਹਦੇ ਨਾਲ ਜਿਹੜਾ ਗਿਆਨ ਜਿੱਥੇ ਪ੍ਰਾਪਤੀ ਆ ਉਹੀ ਧਰਮ ਕਾਮਯਾਬੀ ਤੱਕ ਤੁਹਾਨੂੰ ਲਿਜਾ ਸਕਦਾ ਹੈ ਬਾਕੀ ਕੋਈ ਧਰਮ ਵੀ ਇਹਦੇ ਗੋਬਿੰਦ ਦੇ ਮਿਹਰ ਨਾਲ ਗੋਬਿੰਦ ਦੀ ਸਮਝ ਨਾਲ ਗੋਬਿੰਦ ਦੇ ਦਰਸ਼ਨ ਨਹੀਂ ਕਰਾ ਸਕਦਾ ਗੁਰ ਪ੍ਰਸਾਦਿ ਸਿਮਨਤਰਹ ਜਾਹੁ ਮਸਤਕ ਪਾਗ ਆ ਜਾਹੁ ਜਿਨ੍ਹਾਂ ਦੇ ਮਤੇ ਭਾਗ ਹੁੰਦੇ ਨੇ ਬਾਗ ਲੋਕ ਦੇ ਜਿਹੜੇ ਉਹ ਕੋਈ ਗਿਆਨ ਦੀ ਕਿਰਪਾ ਨਾਲ ਜੇ ਤਾ ਰਖ ਸਕਦੇ ਨੇ ਆਪਣੇ ਅੰਦਰ ਜੁੜੇ ਰਹਿੰਦੇ ਨੇ ਜਿਨ੍ਹਾਂ ਨੂੰ ਗਿਆਨ ਨਾਨਕ ਆਏ ਸਫਲਤੇ ਜਾਕੋ ਪ੍ਰੀਅ ਸੁਹਾ ਨਾਲ ਪ੍ਰੇਮ ਹੁੰਦਾ ਪਿਆ ਲੱਗਦਾ ਹੈ ਸੱਚ ਨਾਲ ਸੱਚ ਨੂੰ ਜਿਹਨਾਂ ਨੇ ਖਸ ਮੰਨਿਆ ਸੱਚ ਨਾਲ ਪ੍ਰੀਤ ਜਿਹਨਾਂ ਦੀ ਉਹਨਾਂ ਦਾ ਹੁਣ ਹੀ ਸਫਲ ਹੈ ਸੰਸਾਰ ਚ ਉਹਨਾਂ ਦਾ ਜਨਮ ਲੈਣਾ ਸਫਲਾ ਬਾਕੀ ਹੈ ਹੈ ਉਹ ਉਹ ਵਾਹ ਕਿੰਨਾ ਸਫਲਾ ਕਿਹੜਾ ਪਰ ਜਿਹਨਾਂ ਨੇ ਸੱਚ ਅਵਸਥਾ ਦਾ ਬਿਲੇ ਪਹੁੰਚ ਗਏ ਉਹਨਾਂ ਦਾ ਸਫਲਾ ਹੋ ਗਿਆ ਜਿਹਨਾਂ ਨੇ ਸਫਲਤਾ ਪ੍ਰਾਪਤ ਕਰ ਲਈ ਉਹਨਾਂ ਦਾ ਸਫਲ ਹੈ ਬਾਕੀ ਕਿੰਨੀ ਕੋ ਸਫਲਤਾ ਪ੍ਰਾਪਤ ਕੀਤੀ ਅੱਗੇ ਬੈਠੇ ਨੇ ਦੱਸਣ ਵਾਲੇ ਕੋਟੇ ਘਰ ਦੀ ਧਾਨ ਕਰਨ ਜਾ ਕੇ ਪਤਾ ਲੱਗੂਗਾ ਮਨਕ ਜੇ ਨਾਲ ਜਾ ਪਏ ਜਾਈਗਾ ਕਿ ਆਗੇ ਕਾਹਤੇ ਪਕੇ ਰੋਗਾ ਲੱਗੂਗਾ ਠੀਕ ਹੈ ਜੀ ਇੱਥੇ ਗੱਗੇ ਉਪਦੇਸ਼ ਗੋਬਿੰਦ ਜਿਹੜੇ ਗੋਬਿੰਦ ਦੀ ਪਛਾਣ ਜਿਹੜੀ ਹੈਗੀ ਆ ਕੇ ਬਚਨਾਂ ਦੇ ਨਾਲ ਹੋਣੀ ਹੈ ਜੀ ਗਿਆਨ ਦੇ ਬਿਨਾ ਕੁਝ ਨਹੀਂ ਹੈ ਜੇ ਗਿਆਨ ਧਰਮ ਹੈ ਗਿਆ ਤੇ ਸਖਣੀ ਗੱਲ ਨੂੰ ਸਖਣੀ ਕਮਾਈ ਨੂੰ ਤਰਮ ਨਹੀਂ ਮੰਨਿਆ ਗੁਰਬਾਣੀ ਦੇ ਵਿੱਚ ਤਰਮ ਹੈ ਹੀ ਨਹੀਂ ਉਹ ਤੰਦਾ ਹੈ ਤੇ ਇਹ ਤਰਮ ਕੋ ਨਾ ਤੇ ਭਲੇਖਾ ਹੈ ਗਲਤ ਫਹਮੀ ਹੈ ਇਹੋ ਤਰਮ ਗਲਤ ਫਹਮੀ ਚਲੋ ਗਲਤ ਫਹਮੀ ਪਾਉਣ ਵਾਲਿਆਂ ਦਾ ਤੰਦਾ ਜਿਹੜੇ ਗਲਤ ਫਹਮੀ ਚ ਫਸਣ ਵਾਲੇ ਨੇ ਉਹਨਾਂ ਨੂੰ ਗਲਤ ਫਹਮੀ ਹੈ ਜਿਹੜੇ ਬੁੱਧੂ ਰੋਗ ਨੇ ਜਿਨ੍ਹਾਂ ਨੂੰ ਗੁਰਨਾਨ ਦੇਵ ਜੀ ਮੂਰਖੰਦ ਕੋ ਕਹਿੰਦੇ ਨੇ ਗਿਆਨੀ ਨੇ ਉਹਨਾਂ ਦਾ ਉਹਨਾਂ ਨਾਲ ਤੋਂ ਖੈ ਉਹਨਾਂ ਨਾਲ ਫਰੋਡ ਹੈ ਫਰੋਡ ਕਰਨ ਵਾਲੇ ਚੋਰ ਆਰਾਮਖੋਰ ਨੇ ਪਤਾ ਹੈ ਉਹਨਾਂ ਨੂੰ ਠੀਕ ਹੈ ਜੀ ਇੱਥੇ ਆਪਾਂ ਗੱਗੇ ਸ਼ਬਦ ਦਾ ਜਿਸ ਉਪਦੇਸ਼ ਹੈ ਰਿਸ ਜੀ ਜੀ